ਜਦੋਂ ਮਨ ਕਰਕੇ ਨਹੀਂ ਟੁੱਟਦਾ ਤੇ ਇਸ ਦੁਬਧਾ ਦੇ ਵਿੱਚ ਹੀ ਉਹ ਜੀਵਾਤਮਾ ਭਟਕਦਾ ਦੁਖੀ ਹੁੰਦਾ ਹੈ ਤੇ ਸਤਿਗੁਰੂ ਦੀ ਚਰਨ ਸਰਨ ਵਿੱਚ ਆ ਕੇ ਪੰਕਜ ਮੋਹ ਪਗ ਨਹੀਂ ਚੱਲਾ ਹਮ ਦੇਖਾ ਤੈ ਡੁੱਬੀ ਹਲੇ ਇੱਕ ਮਨੁੱਖ ਪਾਣੀ ਦੇ ਵਿੱਚ ਫਸਿਆ ਹੋਇਆ ਉਸ ਦੇ ਵਿੱਚ ਡੁੱਬਦਾ ਪਰ ਇਹ ਚਿੱਕੜ ਦੇ ਵਿੱਚ ਹੈ ਚਿੱਕੜ ਦੇ ਵਿੱਚ ਜਿਹੜਾ ਫਸਿਆ ਹੋਇਆ ਉਹਨੂੰ ਜੇ ਖਿੱਚੋਗੇ ਤੇ ਉਹ ਟੁੱਟ ਜਾਵੇਗਾ ਤੇ ਸਤਿਗੁਰੂ ਦੀ ਚਰਨ ਸਰਨ ਵਿੱਚ ਆ ਕੇ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਕਰਨ ਵਾਲੀ ਇਹ ਹੈ ਕੇ ਸਤਿਗੁਰੂ ਕਿਰਪਾ करे, ਸਾਨੂੰ ਜੜ ਤੇ ਚੇਤਨ ਮਾਇਆ ਦਾ ਅਸਰ ਹੌਲੀ ਹੌਲੀ हटदा, ਹਟਦਾ ਪੂਰੀ ਤਰ੍ਹਾਂ ਹਟ ਜਾਵੇ ਤੇ ਅਸੀਂ ਬੜੇ ਸਹਿਜ ਨਾਲ ਹੀ ਉਸ ਅਵਸਥਾ ਨੂੰ ਪ੍ਰਾਪਤ ਹੋਈਏ ਜਿਹੜੀ है, जम्मन ਲਿਖੀ ਹੈ ਜੰਮਣ ਮਰਨ ਨਾ ਤਿਨ ਕਉ ਜੋ ਹਰ ਲੜ ਲਾਗੇ ਜੀਵਤ ਸੇ ਪ੍ਰਬਾਨ ਹੋਏ ਹਰ ਕੀਰਤਨ ਜਾਗੇ ਕਿ ਸਤਿਗੁਰੂ ਦੀ ਚਰਨ ਸਰਨ ਵਿੱਚ ਆ ਕੇ ਨਾ ਉਹਨਾਂ ਨੂੰ ਜੰਮਣ ਦਾ ਦੁੱਖ ਨਾ ਉਹਨਾਂ ਨੂੰ ਮਰਨ ਦਾ ਦੁੱਖ ਨਾ ਉਹਨਾਂ ਨੂੰ ਮਾਇਆ ਮਾਇਆ ਜਦੋਂ ਅਸੀਂ ਮਨਮੁਖ ਹੋ ਜਾਂਦੇ ਆਂ ਉਦੋਂ ਮਾਇਆ ਆਉਂਦੀ ਵੀ ਦੁੱਖ ਦਿੰਦੀ ਏ ਤੇ ਜਾਂਦੀ ਵੀ ਦੁੱਖ ਦਿੰਦੀ ਆ ਤੁਸੀਂ ਜ세ਦਾਰ ਜੀ ਤੋਂ ਸੁਣ ਰਹੇ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਬਾਰੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਕਿ ਸਾਡਾ ਗੁਰੂ ਨਾਨਕ ਇੰਨਾ ਕੁ ਹੀ ਨਹੀਂ ਕਿ ਇਹ 1526 ਤੋਂ 1765 ਤੱਕ ਹੋਇਆ ਜਦੋਂ ਸ੍ਰਿਸ਼ਟੀ ਨਹੀਂ ਸੀ ਕੁਝ ਵੀ ਨਹੀਂ ਸੀ ਉਦੋਂ ਵੀ ਗੁਰੂ ਨਾਨਕ ਸੀ ਜਦੋਂ ਕੁਝ ਵੀ ਨਹੀਂ ਹੋਏਗਾ ਉਦੋਂ ਵੀ ਗੁਰੂ ਨਾਨਕ ਹੋਵੇਗਾ ਉਹ ਅਕਾਲ ਪੁਰਖ ਹੈ ਤੇ ਉਹ ਸਦਾ ਇਹ ਉਸ ਦੀ ਇਰਜ਼ਾ ਹੈ ਕਿ ਉਹ ਕਦੋਂ ਕਿਸ ਰੂਪ ਵਿੱਚ ਆ ਕੇ ਸ੍ਰਿਸ਼ਟੀ ਦੇ ਪਾਰ ਉਤਾਰੇ ਵਾਸਤੇ ਦਰਸ਼ਨ ਦਿੰਦਾ ਆਦ ਅੰਤ ਇਕਾ ਅਵਤਾਰਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਤੇ ਆਦ ਗੁਰਬਾਣੀ ਵਿੱਚ ਵੀ ਲਿਖਿਆ ਸਤਜੁਗਤ ਹੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤਾਤ ਹੈ ਮਾਣਿਓ ਰਾਮ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰਕੰਸ ਕਿਰਤਾਰਥ ਕੀਓ ਉਗਰ ਸੈਨ ਕਉ ਰਾਜ ਅਭੈ ਭਗਤਹਿ ਜਨਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਪੁਰਖ ਫਰਮਾਇਓ ਕਿ ਜਿਹੜੇ ਅਵਤਾਰ ਭਗਵਾਨ ਰਾਮ ਭਗਵਾਨ ਕ੍ਰਿਸ਼ਨ ਭਗਵਾਨ 52 ਪਿਛਲੇ ਯੁਗਾਂ ਵਿੱਚ ਹੋਏ ਉਸੇ ਹੀ ਲੜੀ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਅਵਤਾਰਿਤ ਹੋਏ ਤੇ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਮਰਦਾਸ ਇਹ ਜਿਹੜੀ ਗੁਰਪੀੜੀ ਸੀ ਇਹ ਕਾਲ ਯੁਗ ਵਿੱਚ ਚੱਲੀ ਤੇ ਨਾਲ ਹੀ ਗੁਰੂ ਨਾਨਕ ਨੇ ਇਤਕਰਾਰ ਕੀਤਾ ਸਾਰਾ ਕਾਲ ਭੋਗ ਸੀ ਨਾਨਕਤਾਰ ਅਵਤਾਰ ਤੇ ਇਹ ਜਿਹੜੇ ਗੁਰੂ ਸਾਹਿਬ ਦੇ ਸੁਪਨੇ ਨੇ ਜੋ ਗੁਰੂ ਨਾਨਕ ਦੇਵ ਦੇ ਸੀ ਜਿਨ੍ਹਾਂ ਦੀ ਇਰਜ਼ਾ ਸੀ ਆਪਣੇ ਗੁਰੂ ਨਾਨਕ ਦੇ ਰੂਪ ਵਿੱਚ ਉਹਨਾਂ ਨੇ ਪੂਰੇ ਕੀਤੇ ਤੇ ਬਾਕੀ ਪੂਰੇ ਕਰਨ ਲਈ ਉਹਨਾਂ ਨੇ ਗੁਰੂ ਅੰਗਦ ਦਾ ਰੂਪ ਧਾਰ ਲਿਆ ਹੋਰ ਜਿਹੜੇ ਸੀ ਉਹਨਾਂ ਨੇ ਗੁਰੂ ਅਮਰਦਾਸ ਦੇ ਰੂਪ ਵਿੱਚ ਪੂਰੇ ਕੀਤੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਗੁਰੂ ਰਾਮਦਾਸ ਦਾ ਰੂਪ ਧਾਰ ਲਿਆ ਇਸੇ ਤਰ੍ਹਾਂ ਇਹ ਤੇ ਸਤਿਗੁਰਾਂ ਦੀ ਰਜ਼ਾ ਹੈ ਜੋ ਕੁਝ ਸਤਿਗੁਰੂ ਸ੍ਰਿਸ਼ਟੀ ਦੇ ਕਲਿਆਣ ਵਾਸਤੇ ਅਵਤਾਰ ਧਾਰਦਾ ਬਖਸ਼ਿਸ਼ ਕਰਦਾ ਉਹ ਕਿਸ ਜਮੇ ਵਿੱਚ ਕਿਸ ਤਰ੍ਹਾਂ ਦੀ ਲੀਲਾ ਕਰੇ ਆਪਾਂ ਕੁਝ ਵੀ ਤੁਲਨਾਤਮਕ ਨਹੀਂ ਕਰ ਸਕਦੇ ਗੁਰੂ ਗਬਿੰਦ ਸਿੰਘ ਜੀ ਲਿਖਦੇ ਨੇ ਬਿੰਨ ਬਿੰਨ ਸਭ ਨੂੰ ਕਰ ਜਾਣਾ ਇੱਕ ਰੂਪ ਕਿਨਹੂ ਪਹਿਚਾਨਾ ਸਾਧਨ ਲਖਾ ਮੂੜ ਨਹਿ ਪਾਇਓ ਸਾਰਿਆਂ ਨੇ ਇਹ ਜਾਮਿਆਂ ਨੂੰ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਮਰਦਾਸ ਵੱਖੋ ਵੱਖਰੇ ਸਮਝ ਲਿਆ ਪਰ ਜਿਨ੍ਹਾਂ ਨੇ ਇੱਕ ਰੂਪ ਜਾਣ ਲਿਆ ਉਹ ਸਾਧ ਨੇ ਸਾਧਨ ਲਖਾ ਮੂੜ ਨਹਿ ਪਾਇਓ ਜਿਨ੍ਹਾਂ ਨੇ ਇਹਨਾਂ ਨੂੰ ਵੱਖੋ ਵੱਖਰੇ ਸਮਝ ਲਿਆ ਭਗਵਾਨ ਰਾਮ ਹੋਰ ਕ੍ਰਿਸ਼ਨ ਹੋਰ ਗੁਰੂ ਨਾਨਕ ਹੋਰ ਗੁਰੂ ਅੰਗਦ ਹੋਰ ਸਤਗੁਰੂ ਰਾਮ ਸਿੰਘ ਹੋਰ ਸਤਗੁਰੂ ਜਗਜੀਤ ਸਿੰਘ ਹੋਰ ਜਿਨ੍ਹਾਂ ਨੇ ਇਸ ਤਰ੍ਹਾਂ ਸਮਝ ਲਿਆ ਉਹਨਾਂ ਨੂੰ ਗੁਰਬਾਣੀ ਅਨੁਸਾਰ ਮੂਰਖ ਆਖਿਆ गया, ਤੇ जेड़े एक रूप ਸਮਝਦੇ ਨੇ ਉਹਨਾਂ ਨੂੰ ਗੁਰਬਾਣੀ साध आख्या गया, गुरु नानक सचे ਸੱਚੇ तो लैके ਲੈ ਕੇ ਸਤਿਗੁਰਾਂ लीला रची ਜੀ ਲੀਲਾ ਰਚੀ ਕਲਯੁਗ ਦੇ ਵਿੱਚ ਕਿ ਸੰਕਟ ਦੇ ਹੀ ਸਮੇਂ ਰਏ ਮੁਸਲਮਾਨਾਂ ਦਾ ਰਾਜ ਰਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਆਪ ਵੀ ਦੇਹ ਕਰਕੇ ਬਾਬਰ ਦੀ ਚੱਕੀ ਚਲਾਉਣੀ ਪਈ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਸਾਰਾ ਜੀਵਨ ਭਰ ਜੂਝਦੇ ਰਹੇ ਉਹਨਾਂ ਦੇ ਸਹਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅੰਗਰੇਜ਼ਾਂ ਨੇ ਜਲਾਵਤਨ ਕਰ ਦਿੱਤਾ ਸਤਿਗੁਰੂ ਹਰੀ ਸਿੰਘ ਜੀ ਤੇ ਉਦੋਂ 50 ਸਾਲ ਪੁਲਿਸ ਚੌਕੀ ਬੈਠੀ ਰਹੀ ਜਿੰਨੇ ਵੱਧ ਤੋਂ ਵੱਧ ਛੱਦਦ ਹੋ ਸਕਦੇ ਸੀ ਅੰਗਰੇਜ਼ਾਂ ਨੇ ਉਸ ਵੇਲੇ ਕੀਤੇ ਤੇ ਨਾਲ ਸਹਿਯੋਗ ਦਿੱਤਾ ਉਹਨਾਂ ਦਾ ਸਾਡੇ ਦੇਸ਼ਵਾਸੀਆਂ ਨੇਹੀਂ ਜਿਹੜੇ ਅੰਗਰੇਜ਼ ਭਗਤ ਉਸ ਵੇਲੇ ਬਣੇ ਹੋਏ ਸੀ ਜਿਹੜੇ ਉਹਨਾਂ ਕੋਲੋਂ ਜ਼ਗੀਰਾਂ ਜਾਇਦਾਦਾਂ ਲੈ ਕੇ ਸੁਖ ਮਾਨ ਰਹੇ ਸੀ ਤੇ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਵੀ ਪੂਰਾ ਜੀਵਨ ਹੀ ਇਸੇ ਤਰ੍ਹਾਂ ਜਦੋਂ ਜਹਾਦ ਕਰਦਿਆਂ ਹੀ ਗੁਜ਼ਰਿਆ ਪਹਿਲੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਫਿਰ ਜੇ ਦੇਸ਼ ਆਜ਼ਾਦ ਹੋਇਆ ਏ ਤੇ ਪਾਕਿਸਤਾਨ ਵਿੱਚੋਂ ਪੱਛਮੀ ਪੰਜਾਬ ਵਿੱਚੋਂ ਉੱਜੜ ਕੇ ਆਇਆਂ ਨੂੰ ਵਸਾਉਣ ਲਈ ਕਈ ਸਾਲ ਇਸ ਗੱਲ ਨੂੰ ਲੱਗ ਗਏ ਉਹਨਾਂ ਨੂੰ ਵਸਾ ਕੇ ਹਟੇ ਹੀ ਸੀ ਕਿ ਆਪਣੇ ਹੀ ਸਿੱਖਾਂ ਵੱਲੋਂ ਤੇ ਕੁਝ ਸਵਾਰਥੀ ਰਾਜਨੀਤਿਕ ਲੋਕਾਂ ਵੱਲੋਂ ਸਤਗੁਰੂ ਜੀ ਤੇ ਮੁਕੱਦਮੇ ਕਰ ਦਿੱਤੇ ਗਏ ਤੇ ਉਸ ਵੇਲੇ ਬੜੇ ਹੀ ਸੰਗੀਨ ਬਾਈ ਕੇਸ ਸੀ ਜਿਹੜੇ ਗੁਰੂ ਪਰਿਵਾਰ ਤੇ ਸਤਗੁਰੂ ਜੀ ਤੇ ਕੀਤੇ ਗਏ ਸੀ ਇਹਨਾਂ ਹਾਲਾਤਾਂ ਵਿੱਚ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਦਾਉਲਾ ਕਰ ਗਏ ਤੇ ਕਈ ਤੁਸ਼ ਬੁੱਧੀ ਵਾਲਿਆਂ ਨੂੰ ਇਹ ਲੱਗਿਆ ਕਿ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੁਝ ਸੱਜਣਾਂ ਨੇ ਇਹ ਗੱਲ ਆਖੀ ਕਿ ਜਿਵੇਂ ਸਿੱਖ ਪੰਥ ਦਾ ਹਾਲ ਹੋਇਆ ਸੀ ਇਸੇ ਤਰ੍ਹਾਂ ਹੀ ਹੁਣ ਨਾਮਧਾਰੀ ਪੰਥ ਦਾ ਇਹ ਹਾਲ ਹੋਵੇਗਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਸੰਭਾਲਿਆ ਹੋਇਆ ਸੀ ਉਸ ਤੋਂ ਬਾਅਦ ਕੋਈ ਸੰਭਣ ਵਾਲਾ ਹੈ ਨਹੀਂ ਸੀ ਸਿੱਖ ਰਾਜ ਖਤਮ ਹੋ ਗਿਆ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਨਾਮਧਾਰੀ ਪੰਥ ਨੂੰ ਸੰਭਾਲਿਆ ਸੀ ਹੁਣ ਇੰਨੇ ਸੰਕਟ ਨੇ ਇਸ ਪੰਥ ਨੂੰ ਇਸ ਵੇਲੇ ਸੰਭਣ ਵਾਲਾ ਇਸ ਤਰ੍ਹਾਂ ਦਾ ਢੱਲੇਦਾਰ ਕੋਈ ਨਹੀਂਗਾ ਹੁਣ ਉਹ ਹੀ ਹਾਲ ਹੋਵੇਗਾ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸੂਰਜ ਇੱਕੋ ਰੁੱਤ ਅਨੇਕ ਜਦੋਂ ਸੂਰਜ ਇੱਕ ਸ਼ਾਮ ਨੂੰ ਅਸਤ ਹੋ ਜਾਂਦਾ ਹੈ ਉਹ ਹੀ ਸੂਰਜ ਦੂਸਰੀ ਸਵੇਰ ਨੂੰ ਇੱਕ ਨਵੇਂ ਚਾਨਣ ਨਾਲ ਇੱਕ ਨਵੇਂ ਤੇਜ ਨਾਲ ਫਿਰ ਉਹ ਹੀ ਸੂਰਜ ਉਦੇ ਹੁੰਦਾ